ਅਨਿ ਰਾਰੇ ਅੱਖਰ ਤੋਂ ਉਪਦੇਸ਼ ਹੈ ਜੀ ਭਗਤ ਕਬੀਰ ਜੀ ਦਾ 35ਵਾਂ ਪੌੜੀ ਜੀ ਰਾ ਰਸ ਨਿਰਸ ਕਰ ਜਾਣਿਆ ਓਏ ਨਿਰਸ ਸੋ ਰਸ ਪਹਿਚਾਨਣਿਆ ਉਹ ਕਹਿੰਦੇ ਜਿਹੜੇ ਸੰਸਾਰੀ ਰਸ ਨੇ ਨਾ ਬੰਦਾ ਜਿਹਨਾਂ ਨੂੰ ਤੂੰ ਰਸ ਮੰਨਦਾ ਸੀ ਆਖਵਾਣ ਵਾਲੇ ਸ਼ਕਤੀ ਸਰਤ ਹਾਂਜੀ ਇਹ ਨਿਰਸ ਕਰ ਜਾਂਦ ਜਾਨ ਲਿਆ ਰਸ ਨਹੀਂ ਹੈਗੇ ਇਹ ਇਹ ਸਰੀਰ ਦੇ ਰਸ ਨੇ ਤੇਰਾ ਸਰੀਰ ਕੇ ਇਹ ਆਤਮਾ ਦਾ ਰਸ ਨਹੀਂ ਇਹਦੇ ਵਿੱਚ ਬਿਲਕੁਲ ਵੀ ਇਹ ਰਸ ਮਿਰਸ ਕਰ ਜਾਂਦੇ ਆ ਹੋਏ ਜਿਹੜਾਸ ਉਹ ਰਸ ਪਛਾਣਿਆ ਤਾਂ ਉਸ ਜੀ ਇਹ ਤੇਰੀ ਪਿਆਸ ਲੱਗ ਠੀਕ ਹੈ ਅਸਲੀ ਰਸ ਸੀਗਾ ਉਹ ਹੁਣ ਰਸ ਪਹਿਚਾਨ ਲਿਆ ਜੀ ਸਵਾਲ ਤਾ ਇਹ ਪਹਿਲਾਂ ਇਹ ਤਾਂ ਹੈ ਜੀ ਫਿਰ ਉਹ ਕੀ ਹੈ ਸਵਾਲ ਹੋ ਤਾਂ ਕਿਤੇ ਜਾ ਕੇ ਪਤਾ ਲੱਗੂ ਹਾਂ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਰਸ ਛੱਡੇ ਜਦੋਂ ਇਹ ਰਸ त्याਗ ਫਰਕ ਨਹੀਂ ਆ ਪੂਸੀ ਖਾ ਕੇ ਵੀ ਠੀਕ ਹੈ ਉਹ ਵੀ ਉਹ ਜਾਈ ਰਸ ਹੈ ਉਹ ਆਗਾਵੀ ਰਸ ਹੋ ਜਾਈਆ ਕੋਈ ਫਰਕ ਨਹੀਂ ਇਹ ਰਸ ਰਸ ਆਵਾ ਫੇਰ ਉਹ ਰਸ ਆਇਆ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਜਦ ਉਹ ਰਸ ਪੀ ਲਿਆ ਇਹ ਰਸ ਚੰਗੇ ਹੀ ਲੱਗਦੇ ਠੀਕ ਹੈ ਜੀ ਇਹ ਸੀਗਾ ਜੀ ਭਗਤ ਕਬੀਰ ਜੀ ਦਾ ਉਪਦੇਸ਼ ਹੁਣ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਜੀ ਰਾਰੇ ਅੱਖਰ ਤੋਂ ਹਾਂ ਜੀ ਰਾਰੇ ਰਬ ਰਹਿਆ ਸਭ ਅੰਤਰ ਜੀਤੇ ਜਨਤਾ ਰਾਣਾ ਰਵਰੇ ਸਭਾ ਦਰਜੇ ਤੇ ਜੀ ਜੰਦਾ ਜਿੰਨੇ ਨੇ ਸਾਰੇ ਦੇ ਰਵਰੇ ਸਾਰੇ ਨੇ ਅੰਦਰ ਹੀ ਆ ਸੋ ਗੜ ਸੋ ਪਾਵ ਫ੍ਰੀਤਨ ਮਿਲੈ ਨਾ ਬਾਰੋਨੀ ਮਿਲਣਾ ਕਿ ਤੂੰ ਜਿਹਨੇ ਲੱਬਿਆ ਸਰੀਰ ਤੇ ਲੱਬਿਆ ਤੇ ਜਦੋਂ ਬਾਹਰਲਾ ਸਰੀਰ ਅੰਦਰਲਾ ਸਰੀਰ ਜਦੋਂ ਦੋਹ ਨੇ ਜਿਆਦਾ ਜੰਤ ਕਹਿੰਦੇ ਜੀ ਅੰਦਰਲਾ ਜਾਣਾ ਬਾਹਰਲਾ ਜਾਨਤਾ ਹੈ ਅੱਛਾ ਜਿਹੜਾ ਮਾਟੀ ਦਾ ਪੁੱਤਰਾ ਇਹ ਜੰਤਾ ਹੈ ਹਾਂ ਜੀ ਹਾਂ ਠੀਕ ਹੈ ਜੀ ਜਨ ਤੋ ਪਾਏ ਧੰਦੇ ਸਭ ਲਾਏ ਕਰਮ ਹੋਆ ਤင် ਨਾਮ ਲਿਆ ਜਨ ਤੋ ਪਾਏ ਧੰਦੇ ਸਭ ਲਾਏ ਪਾਏ ਨੇ ਸਭ ਧੰਦੇ ਲਾਏ ਕਰਕੇ ਸਭ ਧੰਦੇ ਲਾਏ ਹੋਏ ਕਿਰਪਾ ਹੋ ਜਾਂਦੀ ਹੈ ਨਾਮ ਲੈ ਲੈਂਦਾ ਕਰਮ ਹੋਆ ਤੇ ਨਾਮ ਲਿਆ ਇਹ 3ਵੀਂ ਪੌੜੀ ਦਾ ਗੁਰਨਾਮ ਸਾਹਿਬ ਦਾ ਉਪਦੇਸ਼ ਹੈ ਹੁਣ ਗੁਰੂ ਅਮਰਦਾਸ ਜੀ ਦਾ ਉਪਦੇਸ਼ ਹੈ ਜੀ 17ਵੀਂ ਪੌੜੀ 'ਚ ਰਾਰੇ ਚਿਤ ਕਰੀ ਮੂੜੇ ਹਿਰਦੇ ਔਰ ਆਮ ਨੂੰ ਚਿੱਤਰ ਲਿਆ ਜਿਹੜਾ ਅੰਦਰ ਹੈ ਤੇਰੇ ਉਹਦੇ ਬਲ ਝਾਕ ਅੰਦਰ ਭੋਗੀ ਹੋ ਗਏ ਝਾਕ ਅੰਦਰ ਹੈ ਆਮ ਤੇਰੇ ਜੇ ਤਾਂ ਕਰ ਇਸ ਗੱਲ ਦਾ ਕਿ ਅੰਦਰ ਹੈ ਉਹ ਬਾਹਰ ਵਾਲਾ ਆਮ ਤੇ ਅੰਦਰ ਖਾਨੂੰ ਸੀ ਸਭੇ ਕਾਟ ਆਮ ਬੋਲੇ ਉਹ ਚਿੱਤ ਵਿੱਚ ਰੱਖ ਕੇ ਅੰਦਰ ਨੂੰ ਝਾਕ ਕਰੋਂ ਲੱਭ ਜੂ ਸਾਨੂੰ ਆਮ ਅੰਦਰ ਅੰਦਰ ਬੋਲਦਾ ਉਹ ਬੋਲਦਾ ਹੋਜੀ ਗੁਰ ਪ੍ਰਸਾਦੀ ਜਿਨੀ ਰਾਮ ਪਛਾਤਾ ਨਿਰਗੁਣ ਰਾਮ ਤਿੰਨੀ ਬੂਝ ਲਿਆ ਗਿਆਨ ਦੀ ਕਿਰਪਾ ਨਾਲ ਜਿਨੇ ਰਾਮ ਪਛਾਣ ਲਿਆ ਨਿਰਗੁਣ ਰਾਮ ਤਨ ਬੂਝ ਲਿਆ ਉਹ ਨਿਰਗੁਣ ਆਏ ਜਿਹੜੇ ਜੋ ਤਮਸਾਤੋ ਹੈ ਇਹ ਗੁਰ ਜਿਹੜੇ ਨੇ ਇਹਦੀਆਂ ਹੋਰ ਹੈ ਉਹ ਤੁਹਾਡਾ ਸਰਗੁਣ ਰਾਮ ਹੈ ਜੋ ਤਮਸਾਤੋ ਵਾਲਾ ਦੇਤਾਰੀ ਮਾਇਆ ਦੇ ਗੁਣ ਉਹ ਨਹੀਂ ਹੈ ਮਾਇਆ ਦੇ ਗੁਣ ਨਾਲ ਰਹੂ ਮਾਇਆ ਦੇ ਗੁਣਾਂ ਤੋਂ ਨਿਰਗੁਣ ਹੈ ਮਾਇਆ ਦੇ ਗੁਣਾਂ ਤੋਂ ਉੱਪਰ ਹੈ अच्छा जी पले खाये पैदा भी शायद विच गुण नहीं है। पण ओना दा खायो नाम है ना तां निरगुण के है। ओना दा राम रजोतम सतोचे साडा राम रजोतम सतो तो ऊपर है जी। हां नाले जेडे गुण ने राम दा कहंदा सब गुण ਦੋ ਵਾਰਾਰੇ ਅਕਰ ਤੋਂ ਵਿਦੇਸ਼ ਹੈ ਜੀ ਪਹਿਲਾ ਪੌੜੀ 10ਵੀਂ ਹੈ ਜੀ ਅੱਛਾ ਪੌੜੀ ਰਾਰਾ ਰੰਗੋ ਯਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੰਗੋ ਯਮਨ ਆਪਣਾ ਰਾਰੇ ਦਾ ਵਿਦੇਸ਼ਾ ਆਪਣਾ ਮਨ ਨੂੰ ਰੰਗ ਚੜਾਓ ਨਾਮ ਦਾ ਇਹ ਜਪ ਜਪੋ ਹਰ ਹਰ ਨਾਮ ਦਾ ਇਹਦਾ ਰੰਗ ਚੜ ਜੂਗਾ ਰਸਨਾ ਨੂੰ ਬੁੱਧੀ ਰੂਪ ਰਸਨਾ ਬੁੱਧੀ ਨੂੰ ਚੜਨਾ ਰੰਗ ਜੀਵ ਨੂੰ ਰੰਗ ਚੜਨਾਲ ਜੀਵ ਹੋ ਜਿਹੜਾ ਹੈ ਉਹਨੂੰ ਦਾ ਪਾਨ ਖਾ ਕੇ ਰੰਗ ਚੜ ਜਾਂਦਾ ਜੀ ਆਪਣੀ ਜਿਹੜੀ ਰਸਨਾ ਹੈ ਕਾਲੀ ਹੈ ਕਾਲੀ ਹੈ ਬੰਖਾਲੇ ਦਰਗਾ ਕਹੇ ਨਾ ਆਓ ਬੈਠ ਆਦਰ ਸਭ ਦੇਉ ਰੇ ਦਰਗਾ ਕਹੇ ਨਾ ਕੋਉ ਜੇ ਦਰਗਾ ਕੋਈ ਕਹਿੰਦਾ ਜਾਨਤਰੀ ਨਾਨੀ ਕੋਈ ਬੋਲਦਾ ਰੇ ਰੇ ਕਹਨ ਨਾਲ ਨਹੀਂ ਕੋਈ ਬੋਲਦਾ ਆਓ ਬੈਠ ਕਰਨਗੇ ਆਦਰ ਸਾਰੇ ਆਦਰ ਦੇਣਗੇ ਆਦਰ ਨੂੰ ਬੁਲਾਉਣਗੇ ਆਓ ਬੈਠ ਆਦਰ ਸਭ ਦੇਊਗਾ ਆਦਰ ਨੂੰ ਬੁਲਾਉਣਗੇ ਆਦਰ ਦੇਣਗੇ ਹਾਂਜੀ ਰੇਰੇ ਦਰਗਾ ਕਹਿ ਨਾ ਕਹ ਹਾਂਜੀ ਆ ਮਹਿਲੀ ਪਾਵੇਂ ਤੂੰ ਬਾਸਾ ਜਨਮ ਮਰਨ ਨਾ ਹੋਏ ਬਿਨਸਤ ਉਹ ਤੂੰ ਪਾਵੇਂ ਬਾਸਾ ਉਸ ਮਹਿਲ ਨੂੰ ਤੇਰਾ ਨਿਵਾਸ ਹੋ ਜਿੱਤੇ ਜਨਮ ਮਾਰਨਾ ਨਾ ਹੋਏ ਬਨਾਸਾ ਜਿੱਤੇ ਨਾ ਜਨਮ ਨਾ ਮੋਲਣਾ ਨਾ ਨਾਸ ਹੁੰਦਾ ਨਾਨਕ ਬੰਦਾ ਕਰਤਾ ਕਿਤੇ ਮਿਰਤ ਹੈ ਜੀ ਰੋਗ ਹੈ ਜੋ ਹੋਤਾ ਹੈ ਜਨਮ ਉੱਤੇ ਜਾ ਕੇ ਬਸ ਆਉ ਜੂ ਤੇਰਾ ਹਾਂਜੀ ਮਸਤਕ ਕਰਮ ਲਿਖਿਓ ਤੁਰ ਜਾ ਕੇ ਹਰ ਸੰਪੈ ਨਾਨਕ ਕਰਤਾ ਮਸਤਕ ਦੇ ਉੱਤੇ ਲੇਖ ਲੈ ਕੇ ਆ ਹਿਰਦੇ ਚੋਂ ਹਾਰਸਮ ਫਾਈਨਾਂਸ ਕਰਤਾ ਕਹਿੰਦੇ ਉਹਦੇ ਹਰ ਰੁਪਈਆ ਸੰਪਤੀ ਨਾਮ ਤਨਾ ਉਹਦੇ ਘਰ ਹੁੰਦਾ ਉਹਦੇ ਹਿਰਦੇ ਚ ਹੁੰਦਾ ਗਾਂਦ ਕੇ ਘਰ ਕੇਵਲ ਨਾਮ ਹੀ ਸੀ ਇਸ ਕਰਕੇ ਕੋਈ ਵੀ ਅੰਦਰ ਲਿਖਿਆ ਹੋਇਆ ਸੀ ਖੇਸੇ ਪੜਦਾ ਉਪਦੇਸ਼ ਜੀ ਹੁਣ ਤਲਵੀ ਪੌੜੀ ਦਾ ਉਪਦੇਸ਼ ਹੈ ਜੀ ਪੌੜੀ ਰਾਰਾ ਰੇਨ ਹੋਤ ਸਭ ਜਾ ਕੀ ਤਜ ਅਪਮਾਨ ਤੇਰੀ ਬਾਕੀ ਰਾਰਾ ਰੇਨ ਹੋ ਤਾ ਸਭ ਜਾ ਕੀ ਸਾਰਿਆਂ ਦੀ ਰੇਨ ਹੋ ਜਾਂਦਾ ਜਿਹੜਾ ਹੋ ਜਾ ਸਾਜਾ ਭਵਾਨ ਉਹ ਵਾਂ ਛੱਡ ਦੇ ਛੁੱਟੇ ਤੇਰੀ ਬਾਕੀ ਉਹ ਰਤਾ ਤੇਰਾ ਬਖਾਇਆ ਨਾ ਕਹਿੰਦੇ ਬਾਕੀ ਉਹ ਛੁੱਟ ਜੂਗੀ ਗਿਆਨਕਾਰ ਛੱਡ ਸਭੇ ਬਾਕੀ ਛੁੱਟ ਜਾ ਅਸਰ ਤੇ ਤੇਰੀ ਬਖਤੀ ਆ ਬਾਕੀ ਬੁੱਕੀ ਛੱਡੀ ਆ ਜਿਨਾ ਘਰ ਵਜਨ ਦਾ ਘਰ ਦਾ ਕਿਰਨ ਵਾ ਜਨਮ ਲੈਣਾ ਪੈਂਦਾ ਔਰ ਬਾਕੀ ਬੁੱਕੀ ਕੁਛ ਨਹੀਂ ਹੈ ਕਾਗਜ਼ਾਂ ਦੇ ਵਿੱਚ ਸਭ ਉਹ ਪਹਾਂਡਾ ਕਰ ਲਦਾ ਪੰਡਤ ਜੰਨਾ ਜਿਹੜੀ ਬਾਕੀ ਨਾਲ ਚੇਤਨ ਦੀ ਕੀਮਤ ਪਾਉਂਦਾ ਹੈ ਜੀ ਦੀ ਗਾਂ ਦਾਨ ਕਰਦੇ ਬਹੁਤ ਕੁਝ ਹੋ ਬੱਚੀ ਹੋਵੇ ਮਗਰ ਅੱਗੇ ਬੱਚਾ ਮੋੜਦੇ ਹੁਣ ਬੱਚੀ ਮੰਗਦੇ ਨੇ ਪਹਿਲੇ ਦੀ ਕਹਿੰਦੀ ਬੱਚਾ ਦੀ ਕਮਦਾ ਬੱਚੀ ਹੁੰਦੀ ਠੀਕ ਹੈ ਜੀ ਰਣ ਡਰ ਗਏ ਤੌਸੀਜੇ ਭਾਈ ਜੋ ਗੁਰਮੁਖੀ RAM ਨਾਮ ਲਿਵ ਲਾਈ ਮਾਨਾ ਜੰਗ ਕਰੇ ਬਿਨਾ ਵਨ ਵਨਦਾ ਇਹਦੀ ਛੁੜ ਜੀ ਦੀ ਉਹਦੀ ਗੱਲ ਜਿਹੜਾ ਜੰਗ ਜਿੱਤ ਕੇ ਜਾਂਦਾ ਹੈ ਜੋ ਗੁਰਮੁਖੀ RAM ਨਾਮ ਲਿਵ ਲਈ ਜਿਹਨਾਂ ਗੁਰਮੁਖਾਂ ਨੇ RAM ਨਾਮ ਨਾਲ ਲਿਵ ਲਾ ਲਈ ਉਹ ਪਹਿਲਾਂ ਮੰਨ ਲੋ ਜਿਤਨਾ ਬੰਦਾ ਉਹਨਾਂ ਨੂੰ ਵਾਨਾ ਲੜ ਕੇ ਵਾਨ ਨੂੰ ਵਧੀਆ ਹੋਵੇ ਪਾੜੇ ਮਰ ਜਣ ਉਹ ਬਾਉਂਡਰੀ ਨਾ ਪਸੰਦ ਨਹੀਂ ਕਰਦਾ ਮਨ ਬਾਉਂਡਰੀ ਜਿਹੜਾ ਨਾ ਪਸੰਦ ਨਹੀਂ ਕਰਦਾ ਉਹ ਕੁਝ ਨਾ ਪਸੰਦ ਨਹੀਂ ਕਰਦਾ ਆਪਣੀ ਪਾਰੀ ਚੱਲਣਾ ਚਾਹੁੰਦਾ ਰਹਿਤ ਰਹਿਤ ਰਹਿ ਜਾਏ ਬਿਕਾਰਾ ਗੁਰਪੂਰੇ ਕੇ ਸ਼ਬਦ ਅਪਾਰ ਰਹਿਤ ਰਹਿਤ ਦੋ ਵਾਰ ਆਇਆ ਰਹਿਤ ਦੇ ਵਿੱਚ ਰਹਿਣ ਕਰਕੇ ਸਾਡੀ ਰਹਿਤ ਹੈ ਮਰਿਆਦਾ ਹੈ ਦੀ ਬਕਾਰ ਦੂਰ ਰਹਿ ਜਾਂਦੇ ਨੇ ਬਕਾਰ ਰਹਿਤ ਅੰਦਰ ਨਹੀਂ ਵੜਦੇ ਰਹਿ ਦੇ ਬਾਉਂਡਰੀ ਚ ਬੁਖਾਰ ਆਈ ਨਹੀਂ ਸਕਦੇ ਰਹਿ ਦੇ ਉੱਥੇ ਦਾ ਪਰਮਾਗਰ ਉੱਥੇ ਜਲ ਜਾਣਗੇ ਰਹਿ ਤ ਰਹਿ ਤ ਰਹਿ ਜਾਣ ਬੁਖਾਰਾ ਹਰਾਇ ਦੇ ਵਿੱਚ ਰਹਿੰਦਾ ਜਦੋਂ ਰਹਿ ਜਾਂਦਾ ਨੇ ਗੁਰਪੂਰੇ ਸ਼ਬਦ ਅਪਾਰ ਦਾ ਜਿਹੜਾ ਉਪਦੇਸ਼ ਸੀ ਅਪਾਰ ਹੋਇਆ ਅਪਾਰ ਉਪਦੇਸ਼ ਸੀ ਐਡਾ ਬੜਾ ਉਪਦੇਸ਼ ਕਹਿੰਦੇ ਤੂੰ ਰਹਿਤ ਵਿੱਚ ਰਹਿ ਕੋਈ ਨਹੀਂ ਨੇੜੇ ਤੇ ਆਉਂਦਾ ਬੁਖਾਰ ਬਿਲਕੁਲ ਨਹੀਂ ਹੁੰਦੇ ਪੱਕੀ ਗੱਲ ਹੋ ਨਹੀਂ ਹੁੰਦੇ ਹੇ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰ ਦਾਤੇ ਰਾਤੇ ਰੰਗ ਨਾਮ ਜਿਹੜੇ ਨਾਮ ਦੇ ਨਾਮ ਦੇ ਹੁੰਦੇ ਨੇ ਉਹ ਰਾਮ ਦੇ ਰਸ ਦਾ ਵੀ ਉਹਨਾਂ ਨੂੰ ਰਸਾ ਹੁੰਦਾ ਹੈ ਆਤਮਾ ਰਸ ਨਸ਼ਾ ਵੀ ਹੁੰਦਾ ਹੈ ਨਾਮ ਰਸ ਨਸ਼ਾ ਵੀ ਹੁੰਦਾ ਹੈ ਮਾਤੇ ਜੇ ਹੁੰਦੇ ਨੇ ਉਹ ਨਾਡਕ ਹਰਗੁਰ ਕੀ ਦੀ ਧਾਤ ਹੈ ਤੁਹਾਡੇ ਸੰਗ ਨਾਮ ਦੀ ਧਾਤ ਦਿੱਤੀ ਹੁੰਦੀ ਹੈ ਜਿਹਨਾਂ ਨੂੰ ਉਹਨਾਂ ਨੂੰ ਰੋਗ ਦਾ ਜਿਹੜਾ ਰਾਸਾ ਕੋਈ ਤਾਂ ਤੋਂ ਨੋਗ ਪਾਇਆ ਜਾਂਦਾ ਹੈ ਤੋਂ ਨਾਮ বিনা ਨਾਮ ਦੀ ਕਿਤੋਂ ਮਿਲਦਾ ਇਹ ਹੈ ਇਹਾਰੇ ਅੱਖਰ ਦੇ ਸਮਾਪਤੀ ਹੈ ਜੀ ਇਹੀ ਹੈ ਕਿ ਜੇ ਤਾਂ ਰਸ ਆ ਜਾਵੇ ਹਾਂ ਵੀਰ ਜੀ ਕਹਿੰਦੇ ਬਾਕੀ ਰਸ ਜਿਹੜੇ ਸਭ ਫਿੱਕੇ ਪੈ ਜਾਂਦੇ ਆ। ਹਾਂ ਜੀ। ਇਹਹੀ ਉਪਦੇਸ਼ ਪੰਜਵੇਂ ਨੇ ਦਿੱਤਾ ਰਾਰਾ ਰੰਗੋ ਯਮਨ ਰੇਨ ਹੋ ਤਬ ਜਾ ਆ ਗਿਆਨ ਸਰੂਪੀ ਰੇਨ ਹੋਣਾ ਜੀ। ਆਹੋ ਰੇਨ ਹੁੰਦਿਓ ਗਿਆਨ ਸਰੂਪਾ ਬਾਕੀ ਖੇ ਹੁੰਦੀ ਖੇ ਤਾਂ ਬਾਲਾ ਸਰੀਰ ਹੁੰਦਾ। ਮਸਲਾ ਸਰੀਰ ਰੇਣੇ ਹੋ ਸਕਦਾ ਰੋੜਾ ਫੇਰੇ ਰੇਣ ਵਨ ਪੱਥਰ ਰੇਣ ਨੂੰ ਹਾਂਜੀ ਫਿਰ ਉਹਦੀ ਰੇਣ ਵੱਢਣੀ ਹੈ ਬੈਠੀ ਕਰਕੇ ਘਾਲਿਆ ਕਬੀਰ ਕਹਿੰਦਾ ਆਪਸ ਆਪਸ ਜਦੋਂ ਨੂੰ ਥਾਂ ਤੇ ਲਾਉਣਾ ਹੈ ਥਾਂ ਆਪਾਂ ਅੱਜ ਫਿਰ ਇੱਥੇ ਸਮਾਪਤੀ ਕਰਦੇ ਹਾਂ ਤਿੰਨ ਆਪਣੇ ਅੱਖਰ ਰਹਿ ਗਏ ਆ ਉਹਦੇ ਆਪਾਂ ਕੱਲ ਨੂੰ ਕਰ ਲਾਂਗੇ ਹੈ ਨਹੀਂ ਅੱਛਾ ਜੀ